ਸ਼ਲੋਕ ਮਹੱਲਾ 5ਵਾਂ ਲਗੜੀ ਸੁਥਾਨ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਸੈ ਆਣ ਡੁੱਬਣ ਦੇਨਾ ਮਾਂ ਪੀਰੀ ਇਹ ਲਗੜੀ ਸੁਥਾਨ ਜੋੜਨਾਰੇ ਜੋੜੀਆਂ ਉਹ ਨੇ ਜਿਹੜੀਆਂ ਲੱਗੀਆਂ ਨੇ ਜਿਹੜੀਆਂ ਜੁੜੀਆਂ ਨੇ ਸੁਤਾਂ ਸ਼ਬਦਾਂ ਜੁੜੀਆਂ ਨੇ ਜਿਹੜੀਆਂ ਸਤਾਂ ਸੁਰ ਤੇ ਰੂਹ ਉਹ ਜੋੜ ਨਾਲ ਜੋੜਦਾ ਆਪਣੇ ਹੀ ਜੋੜਦਾ ਕੋਈ ਕਿਹ ਗੱਤ ਚਿੱਤ ਦੀ ਗੱਲ ਹੈ ਜੀ ਨਹੀਂ ਤਾਂ ਉਹਦੋਂ ਖੇਦਾ ਸੀ ਭਾਵੇਂ ਇੱਕ ਵਾਰ ਤੂੰ ਦੱਸ ਉਹ ਪਾਸ ਤੂੰ ਮਾਨਕ ਲਹਿਰੀ ਲਖਸੈ ਆਣ ਡੁੱਬਣ ਹੋਰ ਪਲੇਨੀ ਬੱਚੇ ਦੀ ਲਹਿਰਾਂ ਹੁੰਦੀਆਂ ਰਹਿਣ ਕੋਈ ਇਸ ਗੱਲ ਨੂੰ ਹੋਰ ਤਰੀਕੇ ਨਾਲ ਕਹਿੰਦਾ ਕੋਈ ਗਾਹ ਨਿਕਲ ਜਾਂਦਾ ਨਾ ਸੱਤ ਗਾਹਾਂ ਨਿਕਲ ਜਾਂਦਾ ਦੂਜੇ ਸੰਤ ਉਹਨੀਆਂ ਲੱਤਾਂ ਖੇਡਦੇ ਬਾਹਰ ਨੂੰ ਜੋੜਨ ਵਾਸਤੇ ਤੁਹਾਡੇ ਆਗੇ ਐਸੇ ਇਸ ਦੀ ਆ ਸੀ ਦੱਬ ਕੇ। ਹਾਂਜੀ। ਜਿਹੜਿਆ ਸੀਗਾ ਸਾਰੇ ਉਹ ਕਹਿੰਦਾ ਕਬੀਰ ਆਈ 부ਜੇ ਤੈ। ਤੇਨੇ ਕੋਈ ਮਾਇਆ ਹੀ ਹੈ। ਉਹ ਆਇਆ ਸੀ ਸਲਾਹ ਲੈ ਕੇ ਕੋਈ ਵਿਅਕਤੀ ਆਇਆ। ਕੋਈ ਬੁੱਧਰ ਬਣਾ ਲੈ। ਉਹ ਆਪਣ ਨੂੰ ਸਥਾਨ ਬਣਾ ਲੈ। ਕੋਈ ਸਸਤਾ ਬਣਾ ਲੈ 45 ਉਹ ਲੈ ਵਲੈਕਟ ਵਰਕ ਬਣਾ ਦੇ ਪੂਰਾ ਐਨਾ ਕਲਖ ਵੀਰਿਆ ਵੀਰ ਆਈ ਮੁਝੇ ਤੇ ਅਨਕ ਗਨੇ ਕਰ ਭੇਖ ਵੇਖਾਂ ਭੇਖ ਦੇ ਰੂਪ ਚ ਮਾਇਆ ਕਰੇ ਕਰ ਭੇਖ ਹੰਦ ਰੱਖੇ ਗੁਰ ਆਪਣੇ ਗੁਰ ਨਾਲ ਤੇ ਤੇ ਮਹਾਪ੍ਰੀ ਗੁਰਦੇਵ ਫਤ ਮਾਤਾ ਗੁਰਦੇਵ ਸਤਾਰ ਹਾਂਜੀ ਉਹ ਰੱਖ ਕੇ ਗੁਰਾ ਪੜ੍ਹਨ ਉਰ ਕੀ ਦੁਆ ਦੇਸ ਮੈਂ ਤਾਂ ਆਪਣੇ ਮਾਤਰ ਨੂੰ ਬਚਾਲਿਆ ਗੁਰਦੇਵ ਨੇ ਬਚਾਲਿਆ ਉਹ ਨਮਸਕਾਰ ਕੇ ਛਿਲੇ ਆ ਗਏ ਜਿੱਦ ਮੈਂ ਤਾਂ ਚਿੰਤਾਰ ਕਰਦਾ ਕੀ ਹੋਊਗਾ ਆਪ ਮਰੇ ਬਣਾ ਸਵਰਗ ਰਹੀਆਂ ਆਉਣ ਪੈਸਿਆਂ ਨਾਲ ਇਹ ਪ੍ਰਚਾਰ ਨਹੀਂ ਹੋਇਆ ਕਰਦਾ ਇਹ ਤਾਂ ਬਹੁਤ ਰਹਿਤ ਸੰਸਾਰ ਛਡਾਉਣੇ ਜਿਹਦੇ ਸੰਸਾਰ ਦੇ ਲਾਲਚ ਨੂੰ ਸੰਸਾਰ ਦੇ ਲਾਲਚ ਵਾਸਤੇ ਤੁਸੀਂ ਨਾਮ ਜਪਾ ਰਹੇ ਹੋ ਸੰਸਾਰ ਛੱਡਣ ਵਾਸਤੇ ਨਾਮ ਜਪੀਦਾ ਤੇ ਕੱਲੇ ਪੁੱਠੀ ਪੈ ਭਾਵ ਕੀ ਹੈ ਜੀ ਲੱਖ ਸਹਿ ਆਣ ਲਕੋ ਤੇ ਇਹ ਹੁਣ ਸਹਿ ਅਖਰ ਜਦੋਂ ਆਪਾਂ ਸਹਿਵੰਗ ਪੜ੍ਹਦੇ ਹਾਂ ਫਿਰ ਇਹਦਾ ਅਰਥ ਕੀ ਬਣਦਾ ਵੀ ਹਿੱਸਿਆਂ ਚ ਹੋ ਗਿਆ ਸਹਿ ਤੋਂ ਸਹਿਵੰਗ ਕਰਦੇ ਹਾਂ ਬਿਲਕੁਲ ਨਹੀਂ ਫਸਾਇਆ ਉਸ ਆਇਆ ਠੀਕ ਹੈ ਬਾਬਾ ਚੌਧੇ ਇਸ ਪ੍ਰਿੰਟ ਦੀ ਕਹਾਣੀ ਦੀ ਜਿਹੜਾ ਸੋਇਲ ਆਫ ਦਾ ਵਾਵਰਚਾ ਜੀ ਪ੍ਰਿੰਸੀਪਲ ਭਜਨ ਸਿੰਘ ਦੀ ਉਹਨਾਂ ਨੇ ਸਵੈਪੰਗ ਲਿਖਿਆ ਹੋਰ ਅਜੇ ਤੱਕ ਕਿਸੇ ਨੇ ਸਵੈਪੰਗ ਨਹੀਂ ਲਿਖਿਆ ਹੱਥ ਲਿਖਤਾਂ ਜਿਹਦੇ ਗਵਾਹ ਤਾਂ ਸੀਗਾ ਲਿਖਿਆ ਲੈ ਗਿਆ ਉਹ ਫੌਜੀ ਲੈ ਗਿਆ अच्छा भाई साहब मैंने आपने अपने कान्हाड़ पढ़े हैं स्वातो के पूर्ण हाथ से ग्रंथ लिखता है उन्होंने अपनी पुस्तक ਇੱਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਬੰਦੀ ਬੰਦੀ ਤੇ ਹਾਵਲਾ ਹਾਂਜੀ ਇੱਕ ਸਾਥੀ ਲੱਦਮ ਦੁੱਖ ਹਰਤਾ ਹਰ ਨੋਗੋ ਇਹ ਜਿਹੜੀ ਨਾ ਸੁਰਤ ਚ ਰੋਕੜੀ ਆਪਣੀ ਰੋਕੜੀ ਬੰਨ ਹਾਂ ਇਹ ਹਾਵਲਾ ਹੈ ਇਹ ਤਾਂ ਬਨਣੀ ਹੈ ਇਹ ਧੰਕਰ ਜਗਾਂ ਨੂੰ ਜਾ ਰਹੀ ਹੈ ਇਹ ਨਰਕ ਨੂੰ ਲੈ ਕੇ ਜਾ ਰਹੀ ਹੈ ਸੋਸ ਤਾਂ ਬਨਣੀ ਦਾ ਰਸਤਾ ਰਸਤਾ ਜਲਾ ਕੇ ਪੁੱਟੀ ਗੰਗਾ ਜਗਤ ਨੂੰ ਲਾਹੀ ਕੀ ਹੈ ਬਨਣੇ ਆਪਣੀ ਸੋਚ ਹੈ ਰੋਕਣੀ ਆਪਣੀ ਸੋਚ ਹੈ ਕੇ ਹਵਲਾ ਬਣਨੇ ਕਿਉਂ ਆ ਇੱਕ ਇਨਕਾਰ ਬਾਬੇ ਨਾਲ ਬਣਿਆ ਹੋਇਆ ਕਾਲ ਨੂੰ ਬਾਬੇ ਨਾਲ ਬਣਿਆ ਹੈ ਕਹਿੰਦੇ ਦੂਰਾ ਬਣਿਆ ਕਿ ਕਲਪਨਾ ਹੀ ਬਣੀ ਰਹੀ ਸੀ ਕਲਪਨਾ ਬਾਬੇ ਨਾਲ ਬੰਦੀ ਹੋਈ ਇਹਨਾਂ ਦੇ ਵਿੱਚ ਪਾਇਆ ਪੈਦਾ ਇਹਨਾਂ ਦੇ ਵਿੱਚੇ ਪਾਇਆ ਬੜੀ ਹੋਈ ਹੈ ਇਹਨਾਂ ਦੇ ਵਿੱਚ ਬੜਿਆ ਹੋਇਆ ਇਹਨਾਂ ਦੇ ਕਾਲ ਬੜਿਆ ਹੋਇਆ ਸਭ ਕੁਝ ਵਿੱਚ ਇੱਕ ਸਾਥੀ ਲੱਗਦੂ ਇੱਕ ਸਾਥੀ ਨੂੰ ਲੱਭਣ ਵਾਸਤੇ ਮੰਦਰੀਏ ਹੈ ਜਿਨ੍ਹਾਂ ਜਿਹੜੇ ਰੋਗ ਦਾ ਨਹੀਂ ਸਾਥੀ ਨੂੰ ਨਹੀਂ ਲੱਭ ਲੱਭ ਸਕਦੇ ਇਹਨੂੰ ਰੋਗਲਾ ਬਣ ਲਾ ਦੂਜਾ ਸਾਥੀ ਲੱਭ ਲੈ ਲੱਗਦੂ ਉਹ ਕੋਣ ਸਾਥੀ ਲੱਗਦੂ ਮਨ ਹਰਤਾ ਹਰ ਸਾਰੇ ਦੁੱਖ ਨੂੰ ਹੱਲ ਕਰਨ ਵਾਲਾ ਹਮਾ ਨਾ ਲੱਭਣ ਵਾਸਤੇ ਨਿਰੋਗਲਾ ਜਿਨ੍ਹਾਂ ਜਿਹੜੇ ਉਹ ਨਹੀਂ ਰੋਗ ਦਾ ਉਹ ਨਹੀਂ ਲੱਭਿਆ ਜਨੂ ਉਹਦੇ ਪਿੱਛੇ-ਪਿੱਛੇ ਤੇ ਤੇਰੇ ਵਿੱਚ ਵਿੱਚ ਅਸੀਂ ਕਾਲ ਦੇ ਕਲਪਨਾ ਦੇ ਪਿੱਛੇ-ਪਿੱਛੇ ਕਾਲ ਸਾਡੇ ਪਿੱਛੇ ਪਿੱਛੇ ਉਹਦੇ ਸੋਨੇ ਦਾ ਹਲਣਾ ਆ ਉਹਦੇ ਵਿੱਚ ਕਲਪਨਾ ਜਾ ਰਹੀ ਹੈ ਰੰਗ ਜਾ ਰਿਹਾ ਹੈ ਗਈ ਪਿਛੋਂ ਜੇ ਬੁੱਧੀ ਗਈ ਠੀਕ ਹੈ ਜੀ ਸਹੀ ਬਨ ਪਿਹੋਲ ਸਾਥੀ ਲੱਦਮ ਦੁੱਖ ਹਲਤਾ ਸਾਥੀ ਕੌਣ ਜਿੱਤੇ ਐ ਸਾਥੀ ਹੋ ਸਾਥੀ ਕੌਣ ਜੀ ਸੁਕਰਤਾ ਹਮਮ ਬਗਵਾਨ ਨੂੰ ਕਹਿਤਾ ਨਾਮ ਉਹ ਤੋਂ ਹੀ ਬਣਦਾ ਨਾਮ ਜੀ ਸੰਤਾਂ ਕੋ ਸੱਚ ਨੂੰ ਗੈਣਾ ਨਾਮ ਸਾਤ ਸ੍ਰੀਪੇ ਹੋ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕੰਮ ਬਲਿਆਰੀ ਜਾਈ ਉਹਨਾਂ ਸੰਤਾਂ ਤੇ ਜਿਹਨੇ ਇਹ ਕਬ ਤੇਰਾ ਪੂਰਾ ਸਰੇ ਚੜਵਾ ਦੇਣ ਮਦਦ ਦੇ ਕੇ ਜੇ ਇਹੇ ਕਾਬੂ ਤੇਰੀ ਮਦਦ ਕਰਕੇ ਤੇਰਾ ਕਾਬੂ ਫਿਰੇ ਦੇਣ। ਨਾਮ ਤੇਰੇ ਪੁਖਾ ਦੇ। ਉਹਨਾਂ ਸੰਤਾਂ ਤੇ ਬਲਿਆਰੇ ਜਾਈਂ ਜਿਨ੍ਹਾਂ ਨੇ ਆਪਣਾ ਕਰ ਲਿਆ ਤੇਰਾ ਸਬਰ ਕਰਵਾ ਦੇਣਗੇ। ਤੇਰੀ ਮਦਦ ਕਰ ਦੇਣਗੇ। ਰੰਗ ਰਤਿਆਂ ਨਾ ਹੋਵੀ ਆਈਆਂ ਖਬਰਾਂ ਤਾਂ ਆਣ ਤੇ ਲੰਦਰ ਤੇ ਸਾਰੇ ਖਿਆਨ ਦੇ ਪ੍ਰਾਪਤ ਕਰ ਲਈ ਗਏ ਨੇ ਸਾਰੇ ਖਿਆਨ ਦੇ ਬਾਲੇ ਦੀ ਮਾਇਆ ਦਾ ਨੇੜੇ ਨਹੀਂ ਜਾਣਾ ਮਾਇਆ ਖਤਰ ਦਾ ਕਰ ਸਕਦੇ ਸਾਡੇ ਕੋ ਪਏ ਦੇ ਖਤਰ ਅਥਰ ਨਾਲ ਆਈ ਕੋ ਜਲ ਜਸੀ ਕਾਲਾ ਹੋ ਜੂਗਾ ਬਹੁਤ ਦੇ ਚੂਤ ਹੋਇਆ ਕਾਲੇ ਤੇ ਠੀਕ ਹੈ ਜੀ। ਪਉਣਿਆਂ ਤੇਰੇ ਰੰਗ ਲੱਤੇ ਨਾ ਜੇ ਤੇਰੇ ਰੰਗ ਦੇ ਵਿੱਚ ਰੁਕੇ ਜਾਂ ਜੇ ਸੱਚ ਦੇ ਰੰਗ ਦੇ ਵਿੱਚੇ ਆ ਜਾਂਦੇ ਆਤਮ ਨੂੰ ਗਿਆਨ ਜਬੇਤ ਦੁਨੀਆ ਦੇ ਸਾਰੇ ਗਿਆਨ ਦੇ ਵਿੱਚੇ ਆ ਜਾਂਦੇ ਕੋ ਨਾਪ ਦੇ ਸਾਰੀ ਸ੍ਰਿਸ਼ਟੀ ਸਾਜੀ ਏ ਨਾਮ ਸਾਡਾ ਸੰਪਰਕ ਹੋ ਗਿਆ ਕਿਆ ਗੱਭਾ ਜੇ ਜਾਪੜਿਆ ਤੇ ਸਾਰੀਆਂ ਨਦੀਆਂ ਵਿਚਕੀ ਦੇ ਦੇ ਹੋਈ ਹੋਈ ਹੋਈ ਮਾ ਹੋ ਵੀ ਪਛੋਤਾਉ ਤੁਦ ਨੂੰ ਜਪਤਿਆਂ ਕੋਈ ਅੱਜ ਤੱਕ ਪਛਤਾਇਆ ਨਹੀਂ ਤੁਦ ਨੂੰ ਜਪਿਆ ਉਹ ਤੈਨੂੰ ਜਪਿਆ ਹੈ ਉਹ ਸੱਚ ਜਿਹੜਾ ਜਾਣੇ ਜਪਿਆ ਹੈ ਹਾਂ ਉਹਨੂੰ ਪਛਤਾਇਆ ਇਹਦਾ ਮਤਲਬ ਹੈ ਜਪਣ ਵਾਲੇ ਪਛਤਾਉਣ ਦੇ ਨੇ ਇਹ ਲੈ ਰਾਮ ਨੂੰ ਨਹੀਂ ਜਾਣਿਆ ਜਿਹੜਾ ਉਹ ਸਾਰੇ ਪਸਤਾਏ ਨੇ ਮਰ ਮਰ ਗਏ ਜਿਹਨ ਰਾਮ ਜਵਾਬ ਆਇਆ ਸੱਚਖੰਡ ਤੋਂ ਮਰ ਮਰ ਗਏ ਜਿਹਨ ਰਾਮ ਨੂੰ ਜਾਣਦੇ ਜਿਹਨੇ ਰਾਮਣੀ ਜਪਿਆ ਉਹ ਸਾਰੇ ਮੁੱਕ ਗਏ ਉਹ ਰਾਮ ਕਹਿੰਦੇ ਆਰਾਮ ਅੰਦਰ ਹੈ ਉਹ ਤੂੰ ਹੀ ਤਾਂ ਰਾਮ ਰਾਮ ਕੀ ਅੰਸ਼ ਹੈ ਰਾਮ ਹੈ ਰਾਮ ਕੀ ਅੰਸ਼ਾ ਦੀ ਅੰਸ਼ ਤੂੰ ਰਾਮ ਕੀ ਅੰਸ਼ ਹੈ ਇਹ ਰਾਮ ਦਾ ਰੂਪ ਹੈ ਤੂੰ ਰਾਮ ਦਾ ਪ੍ਰਕਾਸ਼ ਹੈ ਤੂੰ ਰਾਮ ਦਾ ਪ੍ਰਤਾਪ ਹੈ ਤੂੰ ਉਹ ਆਪਣੇ ਆਪ ਨੂੰ ਨਹੀਂ ਜਾਣਿਆ ਉਹ ਮਰ ਮਰ ਗਏ ਉਹ ਪਛਤਾਏ ਜਪ ਕੇ ਜਾਪ ਜਪੇ ਬੜਾ ਫੇਰੀ ਸਾਰੀ ਵਰ ਤੱਕ ਪਛਤਾਏ ਕੱਖ ਨਹੀਂ ਬਲਿਆ ਪਹੁੰਚ ਨਾ ਸਕੇ ਕੋਈ ਤੇਰੀ ਟੇਕ ਜਨ ਗੁਰੂ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਤੇਰੇ ਜਨ ਅਸਰਾ ਤੇ ਕੇ ਜਾ ਕੇ ਜਿੱਥੇ ਜਾ ਕੇ ਤੇਰਾ ਜੱਟ ਕੇ ਹੈ ਜਿੱਥੇ ਨਾਨਕ ਨੇ ਘਰ ਵਧਾਣ ਨੂੰ ਜਾ ਕੇ ਜਾਨ ਕਵੰਦਾ ਕਰਤਾ ਜਿੱਥੇ ਦਰਤ ਨੂੰ ਜਨ ਬਿਜਰਾ ਇੱਥੇ ਨਹੀਂ ਕੋਈ ਪਹੁੰਚੇ ਕੋਈ ਨਹੀਂ ਪਹੁੰਚਿਆ ਉਹ ਗਿਆ ਉਹ ਆ ਜਿਹਨੇ ਗੁਰਮਤਿ ਦਾ ਸਾਰਾ ਲਿਆ ਗੁਰਮਤਿ ਮਾਰਗ ਧਾਰਨ ਕੀਤਾ ਸਿੱਖਿਆ ਲਈ ਹੈ ਆਪਣੇ ਆਪ ਕੋਈ ਨਹੀਂ ਬੁਝੀਆ ਠੀਕ ਗਿਆਨ ਨਾ ਹੋਏ ਆਈ ਗੱਲ ਹੈ ਗੁਰਤੇ ਪਹਿਲਾਂ ਗਿਆਨ ਦੀ ਉੱਥੇ ਦੀ ਪਹੁੰਚਿਆ ਜਗਾ ਲਗਿਆ ਨਹੀਂ ਉਹ ਕਿਉਂਕਿ ਗੁਰਪੁਰ ਵਾਹ ਵਾਹ ਸੁਖ ਲਹਾ ਚਿਤਾਰਮਨ ਬੋਲੀ ਜਾ ਕੇ ਜਾਗਰਤਨ ਅਸਤਾ ਵਿਚ ਆ ਗਿਆ ਚੇਤਨ ਹੋ ਗਿਆ ਚਿਤਾਰ ਦਮ ਤੇ ਚੇਤਨ ਹੋ ਗਿਆ ਜਾਗ ਗਿਆ ਜਗਤ ਸੁਪਨਾ ਟੁੱਟ ਗਿਆ ਜੇ ਉਹ ਜਾਗਿਆ ਸੁਖ ਜਾਗ ਹੋਇਆ ਮਨ ਚੇਤੇ ਤੇ ਤੇ ਮਤਲਬ ਚੇਤਨ ਅਵਸਥਾ ਵਿੱਚ ਆਇਆ ਤਾਂ ਅੰਤ ਜੜਾ ਆਇਆ ਸੁਤਾਂ ਗਿਆ ਚੇਤਨ ਹੋ ਗਿਆ ਤੇ ਇਹ ਨੂੰ ਸਾਰੇ ਜਿਹਨੂੰ ਸਜਾ ਕੇ ਤਾਗੇ ਜਿਤਾਰ ਗੁਰ ਜੇ ਕੇਤਨੁ ਤੇ ਮਨ ਤੇ ਤਾਰਦਾਂ ਨੂੰ ਇਹ ਸਾਰਾ ਪਿਛਲੀ ਕਹਾਣੀ ਰਾਯਾਰਾਮ ਕਹਾਣੀ ਗਾਣੀ ਜਾਣ ਲੱਗਦਾ ਫਿਰੇ ਸੋ ਕਹਣ ਜਿਤਾਰ ਮੂਲ ਚੁੱਕ ਕਹਾਣੀ ਇਹ ਸਿਫਤ ਭੰਡਾਰ ਕਰਮੀ ਪਾਈ ਹੈ ਸਿਫਤ ਭੰਡਾਰ ਕਰਮੀ ਪਾਈ ਹੈ ਗੋਪੇ ਕੀ ਹੈ ਗੋਵੇ ਸਿਰ ਦਾ ਬਣਾ ਰਿਹਾ ਔਰ ਕੁਝ ਨਹੀਂ ਆ ਸਿਰ ਤੇ ਸਲਾਹ ਆ ਜਿਹੜੀ ਗੁਰਬਾਨੀ ਹੈ ਹੈ ਬਿਲਕੁਲ ਹੋਰ ਨਾਨਕ ਕਰਕੇ ਬੰਦ ਹੋਇਆ ਤੇ ਸਿਰ ਤੇ ਸਲਾਹ ਆਇਆ ਪੜ੍ਹਾ ਆ ਇਹ ਗੁਰ ਕੋਲ ਹੁੰਦਾ ਪੜਾਣ ਕਰ ਪਾਈ ਹੈ ਕੋਈ ਕਰਮਾ ਆ ਚੰਗੇ ਕਰਮ ਕਰਕੇ ਹੀ ਪ੍ਰਾਪਤ ਤੇ ਚੰਗੇ ਕਰਮ ਸੋਚ ਚੰਗੀ ਹੋਵੇ ਕਰਮਾ ਮਤਲਬ ਸੋਚ ਹੈ ਸਤ ਕਿ ਜੰਨੀ ਸੋਚ ਲਈ ਆਇਆ ਹੋਵੇ ਬਿਚੀ ਚੰਦੀ ਸੋਚ ਨਾਲ ਜੁੜਿਆ ਆਇਆ ਹੋਵੇ ਸਤਗੁਰ ਨਦਰ ਨਿਹਾਲ ਬੋੜ ਨਾ ਧਾਈਏ ਸਤਗੁਰ ਨਾਲ ਤਾਂ ਨਿਹਾਲ ਸਤਗੁਰ ਦੀ ਜਿਹੜੀ ਨਜ਼ਰ ਹੈ ਕਿਰਪਾ ਹੋਵੇ ਆ ਉਹ ਕਰਦਵੇ ਦਿਨਾਲ ਹੁੰਦਾ ਹੋ ਜਾਂਦਾ ਦਿਨਾਲ ਇੰਨੀ ਖੁਸ਼ੀ ਹੈ ਜੀ ਤੋਂ ਕੋਈ ਖੁਸ਼ੀ ਹੁੰਦੀ ਹੋਈ ਨਹੀਂ ਨਿਹਾਲ ਇੱਕ ਵਸਤਾ ਖੁਸ਼ੀ ਦੀ ਹਸਤਾ ਉੱਤੇ ਉੱਪਰ ਕੁਝ ਐਸੀ ਚੀਜ਼ ਵਸੂਦੀ ਹੈ ਜਾਂਦੀ ਬਣਨ ਵਾਲੀ ਜਿਹਦੇ ਨੂੰ ਹੋਰ ਕੁਝ ਹੋਵੇ ਨਿਹਾਲ ਠੀਕ ਉਹ ਰਾਜ ਮਿਲ ਗਿਆ ਹੋਰ ਕੀ ਬੰਦ ਨਿਹਾਲ ਬੋਲ ਬੋਲਣਾ ਤਾਂ ਹੀ ਆ ਫਿਰ ਜਵਾਨੇ ਤੁਹਾਨੂੰ ਬੁਲਾਉਗਾ ਕੁਝ ਰੱਖੇ ਆਪ ਦਇਆ ਲ ਕਰ ਦਾਸਾਂ ਆਪਣੇ ਹਰ ਹਰ ਹਰ ਹਰ ਨਾਮ ਜੀਵਾ ਸੁਣ ਸੁਣੀ ਰੱਖੇ ਆਪ ਦਇਆਲ ਆਪ ਰੱਖਿਆ ਕਰਦਾ ਆਪ ਰੱਖਦਾ ਬਾ ਫੜ ਕੇ ਰੱਖਦਾ ਮਨ ਦੀ ਮੰਦਾ ਕਿਹੜੇ ਵੇਲੇ ਕਿਦ ਨੂੰ ਆਪ ਦਇਆਲ ਕਰ ਦਾਸਾਂ ਆਪਣੇ ਰੱਖੇ ਦਾਸਾਂ ਆਪਣੇ ਆਪਣੇ ਦਾਸ ਬਣਾ ਕੇ ਰੱਖਦਾ ਦਾਸ ਉਪਭੁਤੇ ਬਿਨਾ ਇੱਧਰ ਉੱਧਰ ਝਾਕ ਬਗਤੀ ਸਕਦਾ ਜਿਹੜਾ ਦਾਸ ਹੁੰਦਾ ਨਾ ਹਾਂਜੀ ਤੇ ਮਾਲਕ ਵੀ ਆ ਗਿਆ ਫੇਰ ਨਾ ਇੱਧਰ ਉੱਧਰ ਝਾਕ ਬਗਤੀ ਸਕਦਾ ਸੋਚ ਵੀ ਨਹੀਂ ਸਕਦਾ ਆਪਣੇ ਵਾਲਕ ਤੋਂ ਖਲਾਫ ਉਹ ਦਾਸ ਹੰਤ ਸਾਰ ਰੱਖਿਆ ਕਰਦਾ ਲੱਖੇ ਹੀ ਕੰਮ ਹੋ ਸਕਦੀ ਹੈ ਹਰ ਹਰ ਹਰ ਹਰ ਨਾਮ ਜੀਵਾਂ ਸੁਣੀ ਸੁਣੇ ਹਰ ਹਰ ਹਰ ਨਾਮ ਜੀਵਾਂ ਸੁਣੀ ਸੁਣੇ ਹਰ ਹਰ ਦਾ ਜਿਹੜਾ ਨਾਮ ਹੈ ਜਿੰਨਾ ਜੇ ਸੁਣਦਾ ਰਹੂਗਾ ਮਨ ਜੀਵਨ ਚੱਲਦਾ ਰਹੂਗਾ ਬਾਦੀ ਸਰ ਸੁਣੀ ਸੁਰੇ ਥੋਲਵੇ ਜਿਹੜਾ ਨਾਮ ਉਹ ਜੀਵਾ ਬਰਿਆ ਹੋਇਆ ਕਿਉਂਦਾ ਜਾਂਦਾ ਪਹਿਲਾਂ ਬਰਿਆ ਹੁੰਦਾ ਬਰਿਆ ਕਦ ਸੰਤੋਖੀ ਹੁੰਦਾ ਸਤਸਤੋਖ ਦੀ ਅਵਸਥਾ ਮੌਤੀ ਅਵਸਥਾ ਹੈ ਕੁਪਤੀ ਦੀ ਅਵਸਥਾ ਮੌਤੀ ਅਵਸਥਾ ਹੈ ਇਸ ਕਰਕੇ ਮੁਕਤ ਬੱਪਰੇ ਦੀ ਇਹਨੂੰ ਤਿਆਗਣ ਨੂੰ ਕਿਹਾ ਮੌਤ ਹੈ ਕੁਪਤੀ ਨਾਮ ਹੋ ਤੋ ਬਾਦੀ ਅਵਸਥਾ ਹੈ ਸੋ ਜੀ ਸਤਿ ਜੀਵਾ ਸੁਣੀ ਸੁਣੇ ਤੋਂ ਭਾਵ ਹੈਗਾ ਨਾਨਕ ਨਾਮ ਮਿਲੇ ਤਾਂ ਜੀਵਾ ਹੈ ਜੀ ਬੜੀ ਹਾਲ ਦੁਰਦਲਾਬ ਨੇ ਤਾ ਜੀ